सतगुरु कीनी दात मूल ना निकुटई खावो पोंचो सब गुरुमुखी छुटई दात सतगुरु ने जेडी दात बख्शीश कीती है नाम दी पूर्ण ना निकोटी नहीं हो सकदी सतगुरु दा कहता है ज्ञान कदे नहीं हो सकदा साबित हमेशा ही साचर हुवे एक ओट नहीं हुंदी है ਖਾ ਲੋ ਪੁੰਚੋ ਸਭ ਗੁਰੂ ਕੀ ਛੋਟੀ ਖਾ ਲੋ ਪੁੰਚੋ ਖਾ ਤੇ ਹਜਮ ਕਰੋ ਪੁੰਚਣਾ ਹਜਮ ਕਰੋ ਇਹਨੂੰ ਮੰਨੋ ਹਜਮ ਕਰਦਾ ਮੰਨੋ ਜੇ ਖਾਗੋ ਤਾਂ ਮੰਨੋ ਵੀ ਗੁਰਮੁਖ ਛੋਟੀ ਇਸ ਤਰੀਕੇ ਨਾਲ ਸਾਰੇ ਜੇ ਖਾਓਗੇ ਮੰਨੋਗੇ ਤਾਂ ਛੁਟਕਾਰਾ ਹੋ ਗੁਰਮੁਖ ਹਜਮ ਕਰਦੇ ਨੇ ਇਹਨੂੰ ਦੂਜੇ ਖਾ ਲੈਣਦੇ ਨੇ ਤਾਂ ਹਜਮ ਨਹੀਂ ਕਰਦੇ ਤੇ ਹਨਾ ਮੰਨਦੇ ਨਹੀਂ ਮੰਨਨ ਤੇ ਬਣਾ ਛੁਟਕਾਰਾ ਨਹੀਂ ਆਂਦਾ ਗੁਰਬਾਣੀ ਦਾ ਜਗਿਆ ਸਮਝ ਲਿਆ ਸਮਝ ਲਿਆ ਸਮਝ ਵੀ ਲਿਆ ਨਾ ਸਮਝ ਲਿਆ ਤਾਂ ਖਾ ਲਿਆ ਸਮਝੋ ਤੇ ਸਮਝਿਆ ਖਾਦਾ ਜੇ ਮੰਨਿਆ ਨਹੀਂ ਫਿਰ ਨਹੀਂ ਦਲਵਾਨੀ ਫਿਰ ਮੱਖ ਰਿਆ ਨਹੀਂ ਰਹ ਜੂਗਾ छुटकारा ਹੈ ਹਾਂਜੀ ਜੇ ਉਲਟੀ ਕਰ ਦੂਗਾ ਫਿਰ ਸੇਧ ਨਹੀਂ ਬਣਨੀ ਬਿਮਾਰ ਹੋ ਗਿਆ ਉਲਟੀ ਵਾਲਾ ਤਾਂ ਠੀਕ ਹੈ ਜੀ ਅੰਮ੍ਰਿਤ ਨਾਮ ਨਿਧਾਨ ਦਿੱਤਾ ਤੁਸ ਨਾਨਕ ਸਦਾ ਆਰਾਧ ਕਦੇ ਨਾ ਜਾਹੇ ਮਰ ਆਹ ਉਹੀ ਗੱਲ ਉਹਨੇ ਕਹੀ ਹੈ ਨਾ ਦਿੱਤਾ ਕੀ ਹੈ ਅੰਮ੍ਰਿਤ ਨਾਮ ਨੇ ਖੁਸ਼ ਹੋ ਕੇ ਦਿੱਤਾ ਸਤੁਰ ਨੇ ਖੁਸ਼ ਹੋ ਕੇ ਦਿੱਤਾ ਆਹਾਰ ਸਤਗੁਰ ਦੇ ਕੋ ਆ ਗਿਆ ਨਾ ਆਹਾਰ ਸਤਗੁਰ ਇੱਕੋ ਹੀ ਚੀਜ਼ ਨਾਨਕ ਸਦਾ ਆਰਾਧ ਕਦੇ ਨਾ ਜਾਹੇ ਸਦਾ ਹੀ ਰਾਤਨ ਹੋਵੇ ਸਦਾ ਹੀ ਅਰਾਧਨਾ ਦਾ ਮੰਗਣਾ ਸਦਾ ਹੀ ਇਹਦੀ ਭੁੱਖ ਲੱਗੀ ਰਹਿਣੀ ਹੈ ਜਿਹੜੀ ਜਿਹਦੀ ਸਦਾ ਕੱਖ ਹੋਵੇ ਉਧਰ ਧਿਆਨ ਲੈਂਦਾ ਰਾਤਨ ਉਹਦੀ ਜੇ ਅਰਾਧਾ ਰਹੂ ਆਖਾਂ ਜੀਵਾ ਕਿਸੇ ਮਰ ਜਾਊਂ ਜਦ ਬਿਸਰੂਗਾ ਤਾਂ ਮਰੂਗਾ ਜੇ ਨਾ ਜਰਾ ਅਰਾਧਨਾ ਚੱਲਦੀ ਹੈ ਮੰਗਦਾ ਨਾਮ ਉਹਨਾ ਚ ਰਜਾਂਦਾ ਰਹੂਗਾ ਨਹੀਂ ਮਰਦਾ ਕਦੇ ਜਾਏ ਬਾਰਾ ਕਦੇ ਬਣੇ ਵਾਰ ਸਕਦਾ ਜਿੰਨਾ ਜਰ ਇਹਦੀ ਆਰਾਧਨਾ ਨਾਮ ਦੀ ਭੁੱਖੇ ਦੇ ਅੰਦਰ ਕਹਿਣਾ ਬਹੁਤ ਨਹੀਂ ਹੋ ਸਕਦੀ ਜੀ ਮਰ ਸਕਦਾ ਠੀਕ ਹੈ ਸਾਡੀ ਬੰਦਾ ਹੋਰ ਸਾਡੀ ਦਾ ਕੋਈ ਵੇਸ ਨਹੀਂ ਆਰਾਧਨਾ ਸਤਾਨੀ ਕੇ ਆਰਾਧਨਾ ਦੀ ਕਾ ਸਭ ਤੋਂ ਸੋਹਣੀ ਰਸ ਨਾਲ ਖੜੀ ਕੀਤੀ ਹੈ ਸਭ ਤੋਂ ਜੀ ਸਭ ਤੋਂ ਕੁਝ ਚੰਗਾ ਮੰਗਲ ਆਰਾਧਨਾ ਦਾ ਮਤਲਬ ਮੰਗਲ ਹੀ ਹੁੰਦਾ ਸਭ ਤੋਂ ਚੀਜ਼ ਮੰਗਣ ਵਾਲੀ ਕੀ ਹੈ ਹਰ ਹਰ ਨਾਮ ਆਰਾਧਨਾ ਨਾਨਕ ਮੰਗੇ ਨਾਮ ਕਿਰਪਾ ਕਰੋ ਘਰੇ ਰਾਮ ਮੰਗੁਰਾ ਨੂੰ ਹੈ ਮੰਗਨ ਦਾ ਨਰਾਦ ਨੂੰ ਆਰਾਧਨਾ ਭੁੱਖ ਹੈ ਜਿਹੜੀ ਕੀ ਦੀ ਉਹੀ ਮੰਗਰਾ ਹੁੰਦਾ ਜਿਹੜਾ ਨਾਮ ਮੰਗਦਾ ਉਹ ਨਾਮ ਦੀ ਭੁੱਖ ਹੈ ਫਿਰ ਦੁੱਖ ਨਹੀਂ ਕੋਈ ਵੀ ਰਹਿੰਦਾ ਫਿਰ ਜਿਹੜੀ ਸੱਚ ਨਾਲ ਦਤੇੜ ਦੀ ਸਮਾਪਤੀ ਹੈ ਜੀ ਜੀ